ਸ਼ਲੋਕ ਰਸਨਾ ਉਚਰੰਤ ਨਾਮੰ ਸਵਰਣੰ ਸੁਨਤ ਸ਼ਬਦ ਅੰਮ੍ਰਿਤੈ ਨਾਨਕ ਤਿਨ ਸਦ ਬਲਹਾਰੰਗ ਜਿਨਾਂ ਧਿਆਨ ਪਾਲ ਬ੍ਰਹਮਣ ਹੈ ਦੇਖੋ ਉੱਤੇ ਆ ਗਿਆ ਗੁਰਦੇਵ ਪਾਰ ਬ੍ਰਹਮ ਦੀ ਉਹ ਹਜ਼ੂਰੀ ਵਿੱਚ ਰਹਿੰਦੇ ਨੇ ਜਿਹੜੇ ਉਹ ਫਿਰ ਗਾਣ ਗੱਲ ਉਹ ਕੀ ਹੈ ਉਹ ਫਿਰ ਰਸਨਾ ਉਚਰੰਤ ਨਾਮੰ ਉਹ ਰਸਨਾ ਤੋਂ ਗਿਆਨ ਉਚਾਰਨ ਕਰਦੇ ਜੀ ਨਾਮੋਂ ਦਾ ਗਿਆਨ ਆ ਦਾ ਗਿਆਨ ਪਰ ਉਹ ਗਿਆਨ ਕਰਦੇ ਸਭ ਦਾ ਅੰਮ੍ਰਿਤ ਹੈ ਉਹ ਅੰਤਰਾਤਮਾ ਅੰਦਰ ਨਾਲ ਜਿਹੜੇ ਅੰਦਰ ਕੰਨ ਨੇ ਸਭੀ ਦੇ ਨਾਲ ਬਿਨ ਕਨਾਤੇ ਦੁਰਤਵੰ ਸੁਣਦੇ ਨੇ ਉਹ ਰਸਨਾ ਨਾਲ ਆ ਜਾਈ ਬਾਣੀ ਉਚਾਰਨ ਕਰਦੇ ਜੀ ਜਦ ਬਾਣੀ ਉਚਾਰਨ ਕਰਦੇ ਨੇ ਉਹਨਾਂ ਨੂੰ ਖੁਦ ਨੂੰ ਵੀ ਰਸ ਆਉਂਦਾ ਰਸਨਾ ਦਾ ਮਤਲਬ ghee ਨਹੀਂ ਹੈ ਇੱਥੇ हां रास ਨਾਲ ਉਚਾਰਨ ਕਰਦੇ ਨੇ ਰਸ ਭਰਦੇ ਨੇ ਵਿੱਚ ਉਚਾਰਨ ਕਰਨ ਦੇ ਨਾਲ ਵੀ ਰਸ ਆਉਣਾ ਚਾਹੀਦਾ ਸੁਣਨ ਵਾਲੇ ਨੂੰ ਵੀ ਰਸ ਆਉਂਦਾ ਬੋਲਣ ਵਾਲੇ ਨੂੰ ਰਸ ਆਉਂਦਾ ਤੇ ਠੀਕ ਹੈ ਜੀ ਉਚਰਨ ਤੋਂ ਪਹਿਲਾਂ ਉਹਨਾਂ ਦੇ ਸਰੂਣਾ ਨੂੰ ਉਹ ਬਿਨਾਂ ਵਾਲਾ ਸ਼ਬਦ ਸੁਣ ਰਿਹਾ ਹੈ ਜੀ ਹਾਂ ਜੀ ਉਹੀ ਅਸਲੀ ਅੰਮ੍ਰਿਤ ਰੂਪ ਹੈ ਉਹ ਬੁਲਾਏ ਤਾਂ ਹੀ ਬੋਲਦੇ ਨੇ ਉਹ ਬਾਣੀ ਹੈ ਉਹ ਠੀਕ ਹੈ ਜੀ ਹਾਂ ਪਾਉ ਅੱਗੇ ਪਿੱਛੇ ਗੱਲ ਲਿਖਤੀ ਐ ਪਰ ਪਹਿਲਾਂ ਸਰਵਣਾ ਨੂੰ ਸੁਣਦੀ ਐ ਉਸ ਤੋਂ ਬਾਅਦ ਫਿਰ ਰਸਨਾ ਤੋਂ ਉਚਾਰੀ ਜਾਂਦੀ ਐ ਜੀ ਨਾਨਕ ਤਿੰਨ ਸੱਦ ਬਲਹਾਰੰਗ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਨਾਨਕ ਤਿੰਨ ਸੱਦ ਬਲਹਾਰੰਗ ਨਾਨਕਾ ਦਾ ਮਾਨੋ ਤਾਂ ਸੱਦ ਬਲਹਾਰ ਦਾ ਧਿਆਨ ਪਾਰ ਬ੍ਰਹਮ ਦੇ ਵਿੱਚ ਜੁੜਿਆ ਰਹਿਦਾ ਪਾਰ ਬ੍ਰਹਮ ਉਹ ਹੁਕਮਿਆਨ ਪਾਰ ਬ੍ਰਹਮ ਜਿਨ੍ਹਾਂ ਦਾ ਤੁਰ ਕੀ ਬਾਣੀ ਤੇ ਧਿਆਨ ਜੁੜਿਆ ਰਹਿੰਦਾ ਪਰ ਸੁਣ ਕੇ ਉਹਨੂੰ ਅ ਗੁਰ ਬਾਣੀ ਵਿਚਾਰਦੇ ਨੇ ਉਹਨਾਂ ਤੇ ਮ ਖਦਾ ਬਲਿਹਾਰ ਜਾਂਦਾ ਕਿਉਂਕਿ ਉਹ ਸ਼ਬਦ ਪਾਰ ਬ੍ਰਹਮ ਤੋਂ ਆਉਂਦਾ ਹੀ ਪਾਰ ਬ੍ਰਹਮ ਹੈ ਬ੍ਰਹਮ ਤੋਂ ਪਰੇ ਬ੍ਰਹਮ ਤੋਂ ਪਰੇ ਪਾਰ ਬ੍ਰਹਮ ਹੀ ਹੈ ਹੱਬ ਕੁੜਾਵੇ ਕੰਮ ਇੱਕ ਸਾਈ ਬਾਹਰੇ ਨਾਨਕ ਸੇਈ ਧੰਨ ਜਿਨ੍ਹਾਂ ਪਿਰੜੀ ਸੱਚ ਸਿਉ ਕੂੜਾ ਕੁਣਾਵੇ ਕੰਮਾਰੇ ਤਾਂ ਇਹ ਤਾਂ ਮੇਰੇ ਕੋੜੇ ਨੇ ਕੁਣਾਵੇ ਨੇ ਕੋੜੇ ਲੱਗਣ ਆ ਇੱਥੇ ਕੋੜੇ ਆ ਗਿਆ ਹੁਣ ਕੂੜਾਵੇ ਹਾਂ ਜੀ ਕੂੜੇ ਕੂੜੇ ਟੂਠੇ ਜਿਹੜਾ ਧੂੜ ਹੈ ਧੂੜ ਹੈ ਨਾ ਹਾਂਜੀ ਦੇਖੋ ਉੱਥੇ ਦੁਨੀਆ ਦੀ ਗੱਲ ਸੀ ਮੈਂ ਕੀਤੀ ਸਹੀ ਦੁਨੀਆ ਦਾ ਸੱਚ ਹੈ ਧਰਤੀ ਖੜੀ ਹੈ ਜਾਂ ਹੋਰ ਉਹਨਾਂ ਨੇ ਕਹਿ ਦਈਏ ਤਾਂ ਇੱਕ ਸੁਬੰਦਰ ਦੇ ਉੱਤੇ ਚਟਾਈ ਮੋ ਵਿਛਾਈ ਸੀ ਧਰਤੀ ਕੂੜਾ ਫਾਟੇ ਮੈਂ ਅੱਗਾ ਆ ਸਾਨੂੰ ਸੁਣੇ ਇਹਨੂੰ ਤਾਂ ਮੰਨਦੇ ਇਹ ਜਿਹੜੇ ਕੁੜਾਵੇ ਕੰਮ ਨੇ ਇਹੀ ਕੁੜੇ ਇਹੀ ਕੌੜੇ ਨੇ ਸਭ ਕੁੜਾਵੇ ਕੰਮ ਇੱਕ ਸਾਈ ਬਾਹਰੇ ਉਹ ਕੁ ਸਾਈ ਤੋਂ ਬਿਨਾ ਜਿੰਨੇ ਵੀ ਸਾਈ ਦਾ ਜਿਹੜਾ ਜ਼ਿਕਰ ਹੈ ਸਾਈ ਬਾਰੇ ਜੋ ਗਿਆਨ ਅਸੀਂ ਕਰਾਉਨੇ ਆ ਸੁਣਦੇ ਆਂ ਇਹਨੂੰ ਛੱਡ ਕੇ ਸਾਰੇ ਕੌੜੇ ਕੰਮ ਨੇ ਸਾਰਾ ਹੀ ਗਿਆਨ ਜਿਹੜਾ ਕਰਾਉਨੇ ਜਿਹਦੇ ਵਿੱਚ ਸਾਈ ਨਹੀਂ ਆ ਜਾਂਦਾ ਸੱਚ ਨਹੀਂ ਆ ਜਾਂਦਾ ਉਹ ਕੰਮ ਸਾਡੇ ਕੌੜੇ ਦੇ ਸੰਸਾਰ ਹੀ ਸੱਚ ਦਾ ਤਾਂ ਸਮਾਪਰਮਾਨ ਦਿੱਤੇ ਹੋਏ ਨੇ ਆਪਾਂ ਨੂੰ ਜਿਵੇਂ ਸਾਰੇ ਹਰ ਦੁੱਧ ਦੇ ਵਿੱਚ ਉੱਥੇ ਹੋ ਹੈਗਾ ਦਾ ਵੀ ਸੱਚ ਹੈ ਇਹ ਵੀ ਸੱਚ ਹੈ ਉਕੜਾਵਾ ਨਹੀਂ ਧੰਨ ਜਿਨ੍ਹਾਂ ਪਿਰਹੜੀ ਸੱਚ ਨਾਨਕ ਸਹੀ ਧੰਨ ਨਾਨਕ ਕਹਿੰਦਾ ਉਹ ਤੁਹਾਨੂੰ ਨੇ ਦੇ ਪ੍ਰੇਮ ਸੱਚ ਦੇ ਨਾਲ ਯਾਦ ਜਦ ਨੇ ਅਭੀ ਸੱਚਾ ਚਹਿਦੂਆ ਸੱਚ ਨਾਲ ਸਹੈ ਪ੍ਰੇਮ ਜਿਉੜ ਜੀ ਇਹ ਜ਼ਿਆਦਾਤਰ ਜਿਹੜੇ ਸ਼ਲੋਕ ਹੈਗੇ ਪੜੇ ਹੋਏ ਆ ਗਾਏ ਹੋਏ ਆ ਪਰ ਜਿਹੜੇ ਇਸ ਤਰ੍ਹਾਂ ਦੇ ਮਾਮਲਾ ਫਿਰ ਖਰਾਬ ਕਰਦੇ ਨੇ ਉਹਨਾਂ ਨੂੰ ਹਾਂ ਉਹਨਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਨਾ ਫਿਰ ਉਹਨਾਂ ਨੂੰ ਗਾਹ ਇਹਦੀ ਕੋਈ ਕੋਈ ਬਹੁਤੀ ਸ਼ਰਮ ਸੀ ਜੇ ਸਮਝ ਵੀ ਆਵੇ ਤਾਂ ਗਾਉਂਦੇ ਨਹੀਂ ਹੁਣ ਲੋਕਾਂ ਨੂੰ ਪਤਾ ਲੱਗ ਜਾਊਗਾ ਵੀਰ ਕਾਕੀ ਹੈ ਹਾਂਜੀ ਰਾਜ ਸੁਖ ਮਿਠਾ ਨਹੀਂ ਹੈ ਰਾਜ ਸੁਖ ਕੌਣਾ ਇਹਨਾਂ ਨੂੰ ਮਿਠਾ ਲੱਗਦਾ ਗੁਰਬਾਣੀ ਖੋੜਾ ਬੋਲਣ ਦੀ ਜੇ ਫੇਸ ਤੇ ਅਟੈਕ ਹੋ ਆ ਤੁਸੀਂ ਗੁਰਬਾਣੀ ਦੀ ਜੇ ਕਰਦੇ ਇਹਨਾਂ ਨੇ ਕੋਈ ਨਹੀਂ ਹਰਤਨ ਵਾਲ ਬਹੁਤ ਸ਼ਾਕਰ ਬੰਦੇ ਨੇ ਬਹੁਤ ਬੜੀ ਗੱਦਾਰੀ ਕੀਤੀ ਹੋਈ ਹੈ ਗੋਲਕ ਗੁਰੂ ਵੀ ਕਾ ਰਹਿ ਨੇ ਕਰ ਰਹਿ ਨੇ ਗੱਦਾਰੀ ਗੁਰੂ ਪੰਨ ਪਤਾ ਨਹੀਂ ਕਿੱਥੇ ਠੀਕ ਹੈ ਜੀ ਸਤ ਬਲਹਾਰੀ ਤਨਾ ਜੇ ਸੁਣਤੇ ਹਰ ਕਥਾ ਤੇ ਤਨਾ ਜੇ ਸੁਣਤੇ ਹਰ ਕਥਾ ਜਿਹੜੇ ਹਰ ਕਥਾ ਸੁਣਦੇ ਨੇ ਉਹਨਾਂ ਦੇ ਵੀ ਕਹਿੰਦੇ ਸਤ ਬਲਿਆ ਦੀ ਨਾਲ ਚਲੋ ਬੋਲਣ ਜਿਨ੍ਹਾਂ ਨੇ ਕਥਾ ਕੀਤੀ ਆ ਉਹ ਤਾਂ ਹੈ ਜਿਹੜੇ ਸੁਣ ਲੈਣ ਉਹਨਾਂ ਦੇ ਵੀ ਸਤ ਬਲਿਆ ਇਹ ਤਾਂ ਸੁਣ ਕੇ ਹੀ ਹੋ ਜਾਂਦੇ ਕਹਿੰਦੇ ਇਹ ਬੰਦ ਕਰੋ ਇਹ ਠੀਕ ਆ ਗੱਲ हां वो कोई हो सुनो साक्षीणा तो कोई वो ठीक है साक्षी दा सुन लंदा ना पंडित जी लिखी हुई या 몰वान लिखी हुई जेड़ा साडा ठास है 500 में लिखया 몰वान ने चाल समझया ता अपना लिखाई दी पंडित तो 몰ना छाडे तो हमरा झगड़ा रहा ना को ये झगड़ा ही पंडित 몰ना ना पाया होया साक्षी ने पाया है झगड़ा ये तो आज दा झगड़ा पाया है सारा विद्वान सारे विद्वान पंडिते ने आज नु प्रेम करदे ने गੁਰਬानी नु नहीं करदे ने विद्वान ਵਿਦਵਾਨਾਂ ਦੇ ਉੱਤੇ ਹੀ ਨੰਦਾਂ ਦੀ ਗੁਰਬਾਣੀ ਵਿਦਵਾਨਾਂ ਦੀ ਬੁੱਧੀ ਤੇ ਉੱਤੇ ਦੀ ਗੱਲ ਹੈ ਗੁਰਬਾਣੀ ਹਾਂਜੀ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਉਹ ਆਪਣੇ ਮੂਲ ਦੇ ਅੱਗੇ ਛਣਵਾਦਨ ਉਹ ਪੂਰੇ ਵੀ ਨੇ ਪ੍ਰਧਾਨ ਵੀ ਨੇ ਨਹੀਂ ਮੰਨਵਾਇਆ ਜਾ ਸਕਦਾ ਤੇ ਜੋ ਸਰਧਾਨੀ ਨਾਮ ਨੇ ਉਹ ਸਰ ਦਾ ਆਦੇ ਆਦਮੀ ਵਿਦਵਾ ਆਦਮੀ ਦੀ ਜੀਤੀ ਹੋ ਸਕਦਾ ਕਦੇ ਕਿਸੇ ਦੇ ਅੱਗੇ ਬਿਨ ਸੱਚ ਦੇ ਪਾਸ ਹੋ ਗਏ ਤੇ ਕਿ ਪਿੱਛੇ ਜੇ ਗੱਲ ਹੋਈ ਸੀ ਕਿ ਜਿੰਨੇ ਗੁਰਦੁਆਰਿਆਂ ਦੇ ਗ੍ਰੰਥੀ ਐ ਉਹਨਾਂ ਨੂੰ ਤਾਂ ਕਹਿੰਦੇ ਆ ਵੀ ਤੁਸੀਂ ਤਾਂ ਅੰਮ੍ਰਿਤਧਾਰੀ ਚਾਹੀਦੇ ਆ ਆਮ ਸਾਨੂੰ ਚਾਹੀਦਾ ਨਾ ਸਾਨੂੰ ਤਾਂ ਕਹਿੰਦੇ ਕੇਸ ਰੱਖਣੇ ਵੀ ਜ਼ਰੂਰੀ ਨਹੀਂ ਹੈ। ਆਵਾਜ਼ ਦੀ ਗੱਲ ਆ ਤਾਂ ਪੈਸੇ ਕਰਕੇ ਇਹ ਜਿਹੜੇ ਪ੍ਰਧਾਨ ਹੈ ਇੱਕ ਤਾਂ ਨਾਲੇ ਤਾਂ ਕੇਸ ਕੱਟਣਗੇ ਤੇ ਰੋਡੇ ਮੋਡੇ ਹੋਣਗੇ ਤੇ ਸ਼ਰਾਬ ਵੀ ਪੀਣਗੇ ਤੇ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਦੀ ਫਤਿਹ ਬੁਲਾ ਕੇ ਫਿਰ ਲੋਕਾਂ ਨੂੰ ਪੈਸੇ ਮੰਗਣਗੇ। ਆਹ ਚਲੋ ਜੇ ਸ਼ਰਾਬ ਦਾ। ਹਾਂਜੀ। ਹਰ ਜਸ ਲਿਖੇ ਬਿਆੰਤ ਸੋਹ ਹੈ ਸੇ ਹੱਥਾ ਚਰਨ ਪੁਨੀਤ ਪਵਿੱਤਰ ਚਾਲੈ ਪ੍ਰਭ ਪੰਥਾ ਹਾਂਜੀ ਜਿਹੜੇ ਹਰ ਜਸ ਲਿਖਦੇ ਨੇ ਬਿਆੰਤ ਲਗਾਤਾਰ ਲਿਖਦੇ ਰਹਿੰਦੇ ਨੇ ਬਹੁਤ سارے ਲੋਕ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਲਿਖ ਲਿਖ ਕੇ ਕਾਹ ਲੋਕਾਂ ਦੇਣ ਸੇਵਾ ਕਰਦੇ ਤੇ ਉਹਨਾਂ ਸਮਝ ਸੀ ਕੁਰਬਾਨੀ ਦੀ ਉਹ ਕਹਿੰਦੇ ਜਿੰਨੇ ਲੋਕਾਂ ਕੋ ਪਹੁੰਚ ਵੇ ਚੰਦੀ ਆ ਕੀ ਗੱਲ ਹੈ ਕਣਸੀ ਕਬਦੇ ਜੇ ਮੈਂ ਹੁਣ ਕਹਿੰਦਾ ਚੱਕ ਲਿਓ ਫਲਾਣ ਦੇ ਸੋਹਦੇ ਗੁਰੂ ਗ੍ਰੰਥ ਸਾਹਿਬ ਆ ਸਤਕਾਰ ਕਮੇਟੀ ਵਾਲੇ ਇਹ ਕੰਮ ਨਹੀਂ ਸੀਗਾ ਉਹ ਉਹ ਹੱਕ ਲਿਖਦੇ ਨੇ ਮੈਂ ਕਿਹਾ ਪ੍ਰਿੰਟਿੰਗ ਵਾਲਾ ਕੰਮ ਆਹ ਸ਼ਲੋਕ ਪੜ੍ਹ ਕੇ ਬੰਦ ਕਰਨਾ ਚਾਹੀਦਾ ਸਿੱਖਾਂ ਨੂੰ ਕਹੋ ਖਾਸ ਕਰ ਜਿਹੜੇ ਸੰਤਾਂ ਵੀ ਤੁਸੀਂ ਲਿਖੋ ਬਾਣੀ ਉਹ ਲਿਖਣ ਦਾ ਟਾਈਮ ਕਿੱਥੇ ਉਹ ਤਾਂ ਸੌ ਨੇ ਖਾ ਲੈਣਦੇ ਨੇ ਝੂਠ ਬੋਲ ਰਹੇ ਨੇ ਇਹ ਲੋਕ ਤੋ ਤਾਂ ਐਂ ਲੱਗਦਾ ਵੀ ਹੱਥ ਲਿਖਤੇ ਸਰੂਪ ਹੋਣਾ ਚਾਹੀਦਾ। ਹਾਂ ਹਾਂ। ਉਹਦੇ ਹੱਥ ਲਿਖਤੇ ਸੀਗੇ। ਕੀ ਕਹੇ ਜੀ? ਚਰਨ ਪੁਨੀਤ ਪਵਿੱਤਰ ਪ੍ਰਭ ਪੰਥਾ। ਜਿਹੜੇ ਚਰਨ ਨੇ, ਉਪਨੀਤ ਨੇ, ਪਵਿੱਤਰ ਨੇ ਪ੍ਰਭ ਦੇ ਪੰਥ ਤੇ ਚੱਲਦੇ ਰਸਤੇ ਚੱਲਦੇ ਨੇ। ਉਹ ਚੜਨ ਕੌਣ ਹੈ? ਚੜਨ ਕੇ ਚੱਲਣਾ ਔਰ ਪਹਿਲਾਂ ਨਾਲ ਚੱਲੇ ਪਹਿਲਾਂ ਵੱਜੋ ਇਥੇ ਪੁਨੀਤ ਹੁੰਦਾ ਪਹਿਲਾਂ ਖਰਚਰਨ ਪੁਨੀਤ ਪਵਿੱਤਰ ਤਰ ਤੋਂ ਅਗਰਿੰਗ ਸਟੇਜ ਆ ਪੁਨੀਤ ਚੌਥੀ ਸਟੇਜ ਹੁੰਦੀ ਹੈ ਅੱਛਾ ਹਾਂ ਕੀ ਜੇ ਆਪਾਂ ਰਬ ਦੇ ਪੰਥ ਤੇ ਚੱਲੀਏ ਪਵਿੱਤਰ ਤੋਂ ਪੁਨੀਤ ਹੋ ਜਾਾਂਗੇ ਨੇ ਹਾਂ ਪੁਨੀਤ ਹੁੰਦੇ ਨੇ ਜਦੋਂ ਉਗਦਾ ਨਾ ਜਿੰਨਾ ਚਿਰ ਦਾਲ ਦੇ ਦੋਲੇ ਦਾਣੇ ਨੇ ਚਾਹੇ ਕੋ ਪਵਿੱਤਰ ਨੇ ਅੱਛਾ ਫਿਰ ਜਦ ਉਗ ਗਿਆ ਹੋ ਗਿਆ ਫਿਰ ਪੁਨੀਤ ਹੋ ਤਪ ਜਾਣ ਨਹੀਂ ਰਹੀ ਦੋਸਾਂ ਵੀ ਠੀਕ ਹੈ ਚੌਥੀ ਸਟੇਜ ਆ ਫਿਰ ਸਰੂਪ ਚ ਪ੍ਰਗਟ ਹੁੰਦੇ ਨੇ ਜਾ ਕੇ ਦੋ ਸੰਤਾਂ ਸੰਗਿ ਉਦਾਰ ਸਗਲਾ ਦੁੱਖ ਲੱਥਾ ਸੰਤਾਂ ਸੰਗਿ ਉਦਾਰ ਦੇ ਸੰਗਤ ਵਿੱਚ ਉਦਾਰ ਹੁੰਦਾ ਹੈ ਸੰਤਾਂ ਬਹੁਤ ਪਰ ਉਹ ਸੰਤ ਹੋਣ ਦੇ ਮਕਸਦ ਸਿੱਖ ਹੋਣ ਉਹਨਾਂ ਦੀ ਸੰਗਤ ਵਿੱਚ ਉਦਾਰ ਹੋ ਜਾਂਦਾ ਜਿਹੜਾ ਪਹਾੜ ਹੈ ਨਾ ਧਰਮ ਕੋ ਦਾ ਉਹ ਲੈ ਜਾਂਦਾ ਉਹ ਮਨ ਉਹ ਪਰਮ ਭੈ ਦਾ ਭਾਗ ਨਹੀਂ ਜਾਂ ਲੈ ਜਾਂਦਾ ਤਾਂ ਉਦਾਰ ਹੋ ਜਾਂਦਾ ਅਗਲਾ ਦੁੱਖ ਸਾਰਾ ਦੁੱਖ ਲੈ ਜਾ ਹਾਂਜੀ ਤੇ ਸੰਤਾਂ ਦਾ ਪਲੂਰਲ ਜਦ ਆਇਆ ਇਹਦਾ ਭਾਗ ਪਲੂਰਲ ਰੂਪ ਆ ਜੀ ਆਹੋ ਸ਼ਬਦ ਸੰਗਤ ਨਾਲ ਕਹਿ ਲੋ ਚਾਹੇ ਇੱਥੇ ਸੰਗਤ ਹੋਵੇ ਦੋ ਵੀ ਹੋਣ ਹਾਂਜੀ ਕਹਿੰਦਾ ਲੰਗਰੀ ਸੰਗਤ ਨਾਲ ਉਹ ਅੰਗ ਤਾਂ ਸਭ ਕੁ ਬਦਲ ਗਿਆ ਬਦਲ ਜਾਂਦਾ ਆ ਫਿਰ ਤਾਂ ਕੇਵਟ ਵਿਰਲਾ ਸੰਤ ਇੱਥੇ ਸੰਤ ਦਾ ਥੋੜੀਆਂ ਸੰਤ ਐਨੇ ਸੰਗੀਤਾ ਸਿਰਫ ਸੱਚਖੰਡ ਚ ਆ ਜਾਂ ਗੁਰਬਾਣੀ ਚ ਵੀ ਸਾਰੇ ਇਕੱਠੇ ਨੇ ਗੁਰਬਾਣੀ ਦੇ ਨਾਲ ਜੋੜਨਾ ਸੰਤਾਂ ਦੀ ਸੰਗਤ ਨਾਲ ਜੋੜਨਾ ਹੀ ਆ ਹਾਂਜੀ ਠੀਕ ਹੈ ਜੀ ਇੱਥੇ 14ਵੀਂ ਪੌੜੀ ਦੀ ਸਮਾਪਤੀ ਹੈ ਜੀ